ਉਹ ਬਰੇਸ ਉਹ ਬਰੇਸ ਦਿੱਤਾ ਹੈ ਕਿਉਂਕਿ ਜਦ ਬੋਤਸ ਬਲ ਦਿੱਕਾ ਜਦ ਦਿੱਤਾ ਹੁਣ ਉਹ ਦੇਖਿਆ ਸਿੱਖਿਆ ਕਿਹਾ ਬਹੁਤ ਕੁਝ ਹੈ ਸਿੱਖਿਆ ਤਾਂ ਹੈ ਜੋ ਨੇ ਕਿਹਾ ਸਮਝਾਇਆ ਦਿੱਕਿਆ ਉਹ ਹੈ ਜੋ ਸਭ ਸਮਝ ਆਏ जो ਸੁਭ ਜਾਇਆ ਉਹ ਸਿੱਖਿਆ ਜੋ ਸਾਡੇ ਸਮਝ ਆਇਆ ਉਹ ਦੇਖੀ ਜੋ ਪ੍ਰਾਪਤ ਕਰ ਲਈ ਜੇਤਾ ਜੀ ਨੇ ਸਿੱਖਿਆ ਸੀ ਉਹਦੀ ਦੀਖਿਆ ਵੜ ਗਈ ਸਾਰੀ ਗੱਲ ਦੁੱਚ ਆ ਗਈ ਹਾਂ ਫਿਰ ਦੀਖਿਆ ਜੇ ਦੀ ਸਿੱਖਿਆ ਦਿੱਤੀ ਸੀ ਉਹ ਦੀਖਿਆ ਦੇ ਰੂਪ ਬੂਲ ਕਰ ਲਈ ਆਪਣੇ ਫਾਇਦੇ ਚ ਬੰਦ ਕੇ ਵੀ ਫਾਇਦੇ ਚ ਕਬੂਦੀ ਗੱਲ ਮੇਰੇ ਕਬੂਦੀ ਇਹ ਬਦੂਦੀ ਮਨ ਵਿੱਚ ਪਸਾ ਲਈ ਗੁਰੂ ਸਿੱਖਿਆ ਜੇ ਬਰਵਸਾ ਦਰਕ ਮਾਸਤਕ ਭਾਵ ਇਹ ਸਮਝਣਾ ਚਾਹੀਦਾ ਹੈ ਕਿ ਉਹਦੇ ਬਸਤਕ ਭਾਵ ਜੇ ਬਹਿਵਨ ਲਈ ਤਾਂ ਮੇਰੇ ਬਸਤਕ ਭਾਵ ਰਹੀ ਕਿਹੜੀ ਬਦਲ ਗਲੋ ਬਸਤਕ ਭਾਵ ਕਰਦੇ ਹੂ ਅੱਜ ਤੋਂ ਬਾਅਦ ਆ ਬੁੱਲਗੇ ਵੇਲੇ ਫਸਲ ਸਾਡੇ ਘਟਾ ਦੇਤਾ ਸਾਡੇ ਭਾਗ ਤੇ ਤੇਰੀ ਰਜਕ ਫੌਲੀ ਜਿਆ ਇਹਦੀ ਗਾਵਾਂ ਦੇ ਸਾਡੇ ਸਾਡੇ ਬੱਚੇ ਦੇ ਤੇ ਲੈਤੀ ਗਾਵਾਂ ਦੇ ਇਹਦੇ ਭਾਗ ਚੱਟੇ ਸੋਸਾ ਹਾਰੇ चरण पर अब हारे। हार के चरण पर आ लगदा चरण पर चरण पहला बैठ के हारे बाद हर चेतना हर मानवता की अड्डा कोई राजा हारे तो पहले चरण बैठो कुछ जन नॉलेज पे डाल <laughs> भी अर्थ ਯੋਨਾਸੀ ਸਿੱਧਾ ਯਾਰਸ ਲੱਗਦੀਏ ਵੀ ਛੜੜ ਪੈ ਕੇ ਅਸੀਂ ਹਾਰ ਗਏ ਛੜੜ ਪੈ ਕੇ ਵੀ ਕੋਈ ਹਰਿਆ ਜਨ ਪੈ ਕੇ ਤਾਂ ਜਿੱਤੀ ਦਾ ਉਦ ਛੜੜ ਪੈ ਕੇ ਤਾਂ ਜਿੱਤੂ ਗੌੜ ਹੈ ਝਗੜਾ ਹਾਰ ਮੰਨ ਕੇ ਛੱਡਿਆ ਤਾਂ ਸ਼ਰਮ ਕੇ ਜਕੜਾ ਛੱਡਿਆ ਨੇ ਤੇ ਖលਿਆ ਵੀ ਮੈਂ ਰਾ ਝਗੜੇ ਨਾਲ ਮੇਰਾ ਹੀ ਰਸਤਾ ਮੇਰੇ ਝਗੜੇ ਜੋ ਨਿਕਲੂ ਕੋਸ਼ ਨਹੀਂ ਹੈ ਸ਼ਾਸਤਰ ਤੂੰ ਹਾਰ ਮੰਨ ਲੈ तेरी हार ਬੁਲਣਾ ही ਤੇਰੀ ਜਿੱਤ ਤੇਰੀ ਜਿੱਤ ਦੀ ਜਿਹੜੀ ਆਸ਼ਾ ਆਸ਼ਾ ਹੁਲ ਵੀ ਜਿੱਤੇ ਆ ਹੁਲ ਵੀ ਜਿੱਤੇ ਆ ਐਸੇ ਤੇਰੀ ਹਾਰ ਸੁਭੀ ਹੋ ਗਈ ਸਾਰੀ ਜਿੱਦ ਵੀ ਰਗਿਆ ਦੀ ਲੜਦੇ ਸੀ ਉਤਾਲਾ ਉਠਿਰਦੇ ਜਦੋਂ ਬਨ ਹਾਰ ਜਾਂਦਾਂ ਤੇ ਹਾਰ ਬਨਨੇ ਤੇ ਵਰਗੂਦੀ ਤੋਂ ਬਨੂ ਹਾਰੇ ਤਾਂ ਕਿਹਾ ਵੀ ਤੂੰ ਆਪਣੀ ਬੁੱਧੀ ਨੂੰ ਘੱਟ ਬਨੂ ਕਿ ਬੱਲੇ ਹਾਰ ਬੱਲੀਏ ਤਾਂ ਉਹਦੀ ਬੁੱਧੀ ਨੂੰ ਕੋਸਰ ਸਾਵਧਾਨ ਕਰ ਲੋ ਤੂੰ ਤੇਰੀ ਉਗਲ ਭਾਈ ਤੂੰ ਇਹ ਕਹਿਦਾ ਜੀ ਬਰੂ ਹੋ ਕਹੇਗੀ ਹੈ ਜਿਆਦਾ ਠੀਕ ਹੈ ਤੈਨੂੰ ਕੋਈ ਖਿਆਸ ਕਰ ਕਿ ਹਲਤੀ ਹੋਗੀ ਤੇ ਤੇਰੇ 2000 ਕਰੋੜੀ ਜੋ ਸਭ ਚਾਹੀਏ ਗੱਲ ਬਦਰਵੇ ਤਾਂ ਬੱਡੇ ਭਾਗ ਨੇ ਫਿਰ ਉਹ ਹਾਰ ਮੰਨ ਲੈਂਦਾ ਹੈ ਫਿਰ ਉਹ ਹਾਰ ਮੰਨ ਦਿੱਤਾ ਆਪਣੀ ਗੱਲ ਤੇ ਸ਼ਰਤ ਸਾਧ ਦੇ ਕਿ ਉਹ ਨਹੀਂ ਬਦਲਦਾ ਕੋਈ ਤਾਂ ਹਾਰ ਆਪਣੇ ਭਾੜੇ ਕਰਦਾ ਫਿਰ ਉਹ ਕਿਹੜੇ ਭਾੜੇ ਜਲਣਾ ਗੁਰੂ ਵਰਕੇ ਪੜਿਚ। ਇਹਦਾ ਇਹਦਾ ਤਾਂ ਇਹਨੂੰ ਸੁਭਜਾ ਫਾਇਦੇ ਵਾਲੀ ਗੱਲ ਜੇ ਸਮਝ ਆ ਜਾਏ ਉਹ ਚੱਲ ਪੈਦਾ। ਅਸਲ ਜੇ ਜਿੱਦਾਂ ਜੇ ਦੂਆ ਫਾਇਦਾ ਸਭ ਤੋਂ ਉਹਨੇ ਉਹਦੀ ਤਾਂ ਕੋਲ ਨਹੀਂ ਚੇਰਾਕ ਚਲੀ ਉੱਠ ਕੌਲਣਾ ਆਲੋਸ ਹਰਦੂ ਗੈਨਰ ਜਿਹੜੀ ਸਲਤ ਹਰਦਾਈ ਤੇ ਕੀ ਹੋਈ ਸੀ ਨਾ ਪਿੱਛੇ ਜੱਦੀ ਬੀਬੀ ਕੌਲਣਾ ਹੈ ਜੀ ਟੌਪਰ ਚ ਪਿੱਛੇ ਉਹ ਧੌਪ ਪਰ ਤੇ ਟੌਪ ਪਰ ਜਿਹੜੀ ਬੀਬੀ ਹਿਰਦੇ ਚ ਲਗਿਤਲੀ ਕਿ ਦੇ ਲੋਭ ਦੇ ਬਗਰ ਨਾ ਕਰ ਪਾਜੀਏ ਕਿ ਅਸਰ ਉਹ ਤੇ ਤੱਕ ਝਾਕ ਚਲੀ ਜਾਂਦੀ ਤੇ ਤੱਕ ਛੋੜ ਦਾ ਬਗਰ ਚਲੀ ਜਾਂਦੀ ਸਤਵਿਰ ਉਹ ਤੇ ਤੱਕ ਛੋੜੋ ਵੀ ਨਾ ਝਾਕੋ ਵੀ ਨਾ ਦੇਖੋ ਐ ਪਿਛੇ ਲੱਗ ਜੋ ਦੇਖ ਹੈ ਉਹਦੀ ਪ੍ਰਾਪਤੀ ਦੀ ਇੱਛਾ ਹੁੰਦੀ ਹੈ ਸਿਮਰਤ ਸ਼ਾਸਤਰ ਵੇਦ ਪੁਕਾਰੇ ਸਿਮਰਤ ਸ਼ਾਸਤਰ ਵੇਦ ਪੁਕਾਰੇ ਸਿਮਰਤ ਸ਼ਾਸਤਰ ਵੇਦ ਇਹ ਗੱਲ ਕਹਦੇ ਨੇ ਸਸਾਸ਼ਣ ਰਾਜਾ ਸੋਧ ਲੈਂਦਾ ਹਰ ਪੰਜੂ ਨਹੀਂ ਛੱਡਦਾ ਹਾਂ ਮੈਂ ਤਾਂ ਸੋਚਦਾ ਸੋਚਦਾ ਵਿਚਾਰਾ ਇਹਨਾਂ ਹਰ ਭੈਣ ਨਹੀਂ ਛੁੱਟਦਾ ਜਦੋਂ ਸਾਰ ਪਾਸੇ ਤੇ ਵਿਚਾਰ ਵਿਚਾਰ ਕੇ ਵਿਚਾਰ ਵਿਚਾਰ ਕੇ ਸੋਚ ਕੇ ਇਹ ਸਮਝ ਲਿਆ ਕਿ ਸੰਸਾਰ ਚ ਸਰਕਾਰ ਹਰ ਭਜਨ ਤੱਕ ਜੁੜਾ ਭਜਨ ਤੱਕ ਹੈ ਹਰ ਨਾਲ ਜੁੜੇ ਤੇ ਉਹਨੂੰ ਸਰਕਾਰ ਆ ਗਈ ਫੇਰ ਹਰ ਦੀ ਛੱਡ ਰਾਇਆ ਤੋ ਇਹ ਹੋਰ ਕੋਈ ही नहीं ਨਹੀਂ ਹੈ ਬਾਕੀ ਜਤ ਜਿਹੜੇ ਨੇ ਬਾਕੀ ਜਿਹੜੀ ਬਤਾਰੇ ਤਾਂ ਤਾਂ ਤੇ ਆ ਕੀ ਰੇ ਵਰਮਾ ਤਾਂ ਤੰਗਾ ਤਾਂ ਅੜ ਗਈ ਟੀਆ ਜਾਂ ਸਾਰੇ ਪਾਸੇ ਦੇਖ ਆਇਆ ਕਿ ਇਹ ਤੇ ਬਿਲਕੁਲ ਸ਼ਰਕਾਰਾ ਹੈ ਬਾੜ ਪੜੇ ਹੋਰ ਬੇਚਾਰੇ ਉਸਾਈਏ ਦੇਖਿਆ ਦਿਵਾ ਮਾਰ ਕੇ ਵੀ ਉਹਦੇ ਉਹ ਵੀ ਹਕਕਾਰ ਪੈਦਾ ਕਰਨ ਲਈ ਚੀਜੇ ਵੀ ਉਸਕਾਰ ਪੈਦਾ ਕਰਨ ਲਈ ਚੀਜੇ ਵੀ ਹਕਕਾਰ ਪੈਦਾ ਕਰਨ ਲਈ ਤੇ ਆ ਜਿਹੜੀ ਮਤ ਗੁਰਦੁਆਰਾ ਵੀ ਵਿੱਚ ਹਰਿਮੰਦਰ ਸਾਹਿਬ ਦੇ ਖੜਾ ਹੈ ਉਹਦੀ ਨਿਸ਼ਾਨੀ ਖੜੀ ਹੈ ਜਿਵੇਂ ਉਹਦੇ ਆਉਂਦਾ ਦੇ ਨੇ ਮੁਰੜ ਕੇ ਕੋਈ ਅਸਰਾ ਦੀ ਕਿਡਨੈਪਰ ਕਰਕੇ ਲੈ ਕੇ ਆਂਦੀ ਉਹ ਹਾਂ ਭਾਈ ਜਮੇ ਕੋਈ ਗੱਲ ਹੋਊਗੀ ਪਤਾ ਨਹੀਂ ਇਹ ਬਹੁਤੀ ਗੱਲ ਇਹਦੇ ਵਿੱਚ ਕੋਲਾ ਜਿਹੜਾ ਨੋ ਹੈ ਉਸਨ ਵਾਲੀ ਭਾਸ਼ਾ ਦਾ ਨੋ ਕੋਲਾ ਹੈ ਉਹ ਹੈਗਾ ਕਬਲ ਤੋਂ بڑے ਆ ਆ ਕੋਮਨਾ ਨਾਮ ਜਿਸ ਮੁਸਲਮਾਨਾਂ ਦੇ ਕਿਹਦੇ ਨਾਮ ਨਹੀਂ ਸੁਣਿਆ ਜਦ ਤੱਕ ਦੀ ਭਾਸ਼ਾ ਦਾ ਨਾਮ ਜੀ ਅਬੁੱਲ্লাহ ਉਹ ਦਫਾ ਲਾ। ਕਿਰਦੇ ਰਸ ਬੁੱਧ। ਉਦਾਰਨ ਬੁੱਧ ਉਰੇ ਜੋ ਫਲੋਸਫੀਏ ਸਰੋਵਰ ਦੇ ਨਾਲ ਕਾਲ ਦਾ ਬੰਦਰ ਕਬਲ ਦਾ ਬੋਲਡਰ ਜ਼ਰੂਰੀ ਕਾਲ ਸੀ। ਉਦਾ ਸਰੋਵਰ ਹੈ ਨਾ ਉਹ ਰਤ। ਇਹਦਰ ਕਬਲ ਵੀ ਜ਼ਰੂਰੀ ਸੀ। ਉਸ ਫਲੋਸਫੀ ਦੇ 10 ਪੜੇ। ਜੇ ਕਮਲ ਆਇਆ ਤਾਂ ਅਮਰਤ ਸरोवर ਹੈ। ਵੱਡਣਾ ਤਾਂ ਉੱਥੇ ਹੀ ਹੈ ਜਿਵੇਂ ਕਮਲ। ਖੋਲ ਦੇ ਵਿੱਚ ਵੱਡਣਾ ਚਾਹੀਦਾ ਸੀ। ਉਹ ਵੜਾਉਣ ਲੱਗੇ ਹੋਣੇ ਨੇ ਉਹਨਾਂ ਦੇ ਵੜਿਆ ਨਹੀਂ। ਫਿਰ ਉਦੋਂ ਹੀ ਕਹਿੰਦੀ ਗੱਲ ਬਣਦੀ। ਫਿਰਦਾ ਕਮਲਰ ਵੀ ਕਿਹਦੇ ਵਿੱਚ ਕਿਸੇ ਤਰੀਕੇ ਨਾਲ ਉਹ ਸरोवर ਨੂੰ ਫਿੱਟ ਕਰਕੇ ਆਇਆ ਹੀ ਜੂ। ਤੇ ਹਟ ਕੇ ਵਿਚਾਲੇ। ਤੇ ਕੋਸ਼ਿਸ਼ ਕੀਤੀ ਹੋ ਸਕਦੀ ਹੈ ਕਿਸੇ ਕਿਸੇ ਕਿਸੇ ਦਵਾਰ ਦੇ ਮੇਰੇ ਉਹ ਹੁੰਦੇ ਬਾਕੀ ਕੋਈ ਨਹੀਂ ਜਣਜੀ ਇਸਦੇ ਜ਼ਮਾਨੇ 'ਚ ਸਾਦਤ ਦੇ ਜਬਦੂ ਸ਼ਿਕਲ ਹੋ ਸਕਦੀ ਸ਼ੁਰੂ ਹੋਈ ਇਹ ਗੱਲ ਹੈ ਗੁਰੂ ਘਰ ਦੀ ਸੇਵਾ ਨੂੰ ਖਾਣਾ ਢੱਕਾ ਜੋ ਵੀ ਇਹਦਾ ਕੇ ਕਾਜੀ ਕੀਤਾ ਬਸਲ ਬੋਲਣ ਦੇ ਦਰੂਸੀਓ ਕੋਲੋਂ ਉਹ ਤਾਂ ਕੁਝ ਕਹਿਦਾ ਸੀ ਉਹ ਤਾਂ ਕੀ ਤਕਲੀਫ ਸੀ ਤੁਸੀਂ ਕਿਤੇ ਕਿਤੇ ਬੜਾ ਮਾਤੂ ਰੂ ਕਰਦੀ ਤੇ ਪੜਾਈ ਕੀ ਨਗਰਤ ਅ ਫਿਰ ਉਹ ਕਿਵੇਂ ਮਣੀ ਕਿਦੇ ਵੱਡੀ ਬਰਵਤ ਨੇ ਪੜਾਈ ਉਹਨੂੰ ਵੀਰਲ ਉਹ ਬੰਦਾ ਪਧਾਰੀ ਹੈ ਜਿਹੜਾ ਰੋਜ਼ਗਾਰ ਦਾ ਨਾ ਤਾਂ ਖਲਸਾ ਜਿਆ ਹੋਰ ਉਹਦਾ ਲੱਗਿਆ ਬਸ ਇਹ ਸਪਰਕ ਚਾਇ ਇਹ ਬਰੂ ਸੇਬੂ ਬਣਨਾ ਹੁੰਦਾ ਕੀ ਦੇ ਸਪਰਕ ਵਿੱਚ ਸੀ ਜਿੱਥੋਂ ਸੁਰਬਤੀ ਗਿਆਨ ਦਾ ਸਪਰਕ ਤਾਂ ਹੋ ਗਿਆ ਉਹ ਨਿਆਣ ਗੱਲ ਕਰਦਾ ਸੀ ਉਹ ਨਾਲ ਹੋ ਗੁਰੂ ਸਾਹਿਬ ਤੇ ਕੀ ਲੈਣਾ ਸੀ ਨੂੰ ਤਾਂ ਸੀ ਨਿਆਮ ਹੋਰ ਨਾਲ ਸੰਪਰਕ ਦਾ ਆਧਖਾ ਪਤਾ ਪਤਾ ਤਾਂ ਲੱਗ ਗਿਆ ਦੇ ਕੋਈ ਜਿਹੜਾ ਵੀ ਆਦਮੀ ਕੋਈ ਸਿੱਖ ਹੁੰਦਾ ਜੇ ਧਰੂ ਪਤਾ ਲੰਗਦਾ ਉਹ ਤੋਂ ਘਾਹ ਵੀ ਜਾਂਦਾ ਆਪਣੇ ਬੂਟ ਤੋਂ ਜਿਦਾ ਜਿਦਾ ਲੱਗਦਾ ਮੀਆਂ ਮੀਰ ਫਿਰ ਉਹ ਮੀਆਂ ਮੀਰ ਨੇ ਸਿੱਖਉਂਦੀ ਫਿਰੋ ਜਿਉ ਨੂੰ ਕ੍ਰੋਸ ਕਰਕੇ ਆਈ ਤੋਂ ਉੱਪਰ ਗਿਆਨ ਹੁੰਦਾ ਗੁਰੂ ਘਰ ਨਾਲ ਜੁੜੋ ਸੀ ਪਹਿਲਾਂ ਤੋਂ ਜੁੜਿਆ ਜਾਂਦੀ ਫਿਰ ਜਦੋਂ ਮਿਸ਼ਨੜੀ ਪੜ ਪੈਟਰਾਲਿਆਂ ਨੇ ਬੜਾਇਆ ਜੀ ਚਲੋ ਹallelujah ਨਹੀਂ ਛੱਡਦੇ ਪਿੰਡਾਂ ਵਿੱਚ ਦਸ ਕਿਵੇਂ ਛੱਡਣਗੇ ਜੇ ਲੋਕਾਂ ਨੂੰ ਘਾਹ ਨਹੀਂ ਦਿੱਤੀ ਜਾਂਦੀ ਪੂਰੀ ਹੱਟੂ ਤੇ ਤੁਸੀਂ ਪ੍ਰੈਕਟੀਕਲ ਜੀ ਦੇਖਿਆ ਕਰੋ ਵੀ ਪ੍ਰੈਕਟੀਕਲ ਜੇ ਹੋਵੇ ਕਿਵੇਂ ਦੇ ਕੋਈ ਗੱਲ ਐਵੇਂ ਤੁਸੀਂ ਬਹੁਤ ਬਣਾਇਆ ਗੁਰੂ ਸਾਹਿਬ ਦੀ ਉਹਨਾਂ ਨੇ ਗੁਰਦੁਆਰਾ ਬਣਾਈ ਬੈਠੇ ਨੇ ਉਹਦੇ ਵਿੱਚ ਹੋਰ ਉਹਨਾਂ ਨੇ ਤਾਂ ਕਿਸੇ ਸਾਕੀ ਆਹੋ ਜਿਹੜਾ ਬੜਾ ਫੜਾ ਗੁਰੂ ਸਾਹਿਬ ਦਾ ਵੀ ਦੁਕਾਨ ਹੁੰਦਾ ਇੱਥੇ ਹੁੰਦਾ ਸਾਡਾ ਇਹਨਾਂ ਦਾ ਉਹਨਾਂ ਨੂੰ ਗਿਆ ਵੀ ਉਹਨਾਂ ਨੇ ਦਵਾਈ ਲਾਈ ਉਹ ਇਹਦਾ ਉਹ ਨਰੈਣ ਸਿੰਘ ਕੇ ਕੇ ਮਗਰ ਕੇ ਆਈ ਕੇ ਕਹਾਣੀਆਂ ਬਣਾ ਕੇ ਜਿਆ ਲੈ ਕੇ ਆਏ ਘਰੇ ਨੂੰ ਅੱਡ ਬਣ ਕੇ ਵੀ ਉਹ ਗੁਰੂ ਮੈਂ ਤਾਂ ਪਰੇ ਸੀਗੇ ਉਹ ਅੱਡ ਗੱਲ ਆਈ ਗੁਰੂ ਘਰ ਦੇ ਉਹਨਾਂ ਨੂੰ ਟਾਈਮ ਕਿੱਥੇ ਮਿਲਿਆ ਚਾਰ ਦੇ ਜੰਗਾ ਕਰੀਏ ਤੇ ਪੈ ਹੂੰ ਡੇੜੇ ਹੀ ਦਿਨ ਸੰਪਰਕ ਚਲੀ ਗਏ ਬਿਲਕੁਲ ਇਸ ਪਰ ਉਹ ਗਏ ਨੇ ਕੇ ਉੱਥੇ ਕਿਲੇ ਹੈ ਇਹਦੇ ਤਿੰਨ ਦੋ ਹੀ ਗੁਰੂ ਹੀ ਸੱਚ ਤਾਂ ਧਾਰੀ ਜਿਆਦਾ ਦਿਖਾਇਆ। ਹਾਂ ਇਹਨਾਂ ਦੇ ਤੰਤ ਕੋੜਾ ਜਾਂ ਸ਼ਿਕਾਰ ਜਾਂ ਮਣਗੇ ਆ। ਉਹਨਾਂ ਨਾਲ ਹੀ ਤਿੰਨ ਤਿੰਨ ਸ਼ਾਦੀਆਂ ਜੋੜੀਆਂ ਰਾਜੇ ਜੋਗੀ ਨੇ ਕਿਹਾ ਇਹ ਗੱਲ ਥੋੜਾ ਹੁੰਦੀ ਆ। ਜਦੋਂ ਨਹੀਂ ਉਹ ਸੰਸਾਰੀ ਰਾਜੇ ਜੋਗੀ ਦੇ ਦਾ ਰਾਜ yog ਹੈ ਇੱਕ ਰਾਜ yogੀ ਹੈ ਹਾਂ ਇਹ ਨਾਲੇ ਫਿਰ ਇਹ ਹੋ ਗਿਆ ਮੇਰਾ ਤੇ ਫਿਰ ਰਾਜੇ ਨੇ ਸ਼ੂਟ ਆ ਬਣ ਕੇ ਇੱਕ ਤੋਂ ਵੱਧ ਔਰਤਾਂ ਰੱਖ ਲਗਦਾ ਸ਼ੂਟ ਸ਼ਾਲ ਦੀ ਗੱਲ ਹੈ ਤੇ ਔਰੀ ਉਹ ਜੇ ਇਦਾਂ ਕਰਦੇ ਐ ਨੇ ਜਾਨੀ ਰਾਜਾਂ ਦੇ ਉੱਤੇ ਜਿਹੜਾ ਕਿਸੇ ਕਿਸ ਦਾ ਜਿਹੜਾ ਪੈਰ ਇਹਦੇ ਨਾਲ ਧਰਮ ਦਾ ਕੋਈ ਸਬੰਧ ਨਹੀਂ ਵਾਜ ਜਿਹੜੇ ਤੇ ਬੇਹੋਣਾ ਦਾ ਧਰਮ ਨਾਲ ਤਵਜਾ ਸਾਡੇ ਵਾਲੇ ਧਰਮ ਨਾਲ ਹੋਇਆ ਸਾਡਾ ਸਮਾਜ ਜਰੂਰ ਤੋਂ ਵਖਰਾ ਕਰਦਾ ਜੂੜਦਾ ਡਾਰ ਵਿੱਚੋਂ ਗਿਰਗ ਨੂੰ ਵੀ ਛੋੜਦਾ ਅਸੀਂ ਅੱਜ ਧਰਮ ਨੂੰ ਗਿਰਗਾਂ ਦੀ ਢਾਲ ਬਣਾਉਣ ਤਦ ਖੇਡਦਾ ਇਸ ਪਾਸੇ ਦਾ ਵਿਚਾਰ ਕਿ ਕੌ ਕਟ ਘਾਟੀ RAM ji ਦੇ ਚੜ ਰਹੇ ਹੋ ਤਬੀਰ ਵੀ ਪਾਛੀ ਪੜੀ ਬਹੀਰ ਉਹ ਵੀ ਡਾਰੇ ਆ ਡਾਰ ਇਹਦਾ ਡਾਰ ਵਿੱਚੋਂ ਅਟਕੜਦਾ ਅੱਜ ਆ ਡਾਰ ਬਣਾ ਰਹੇ ਆ ਇਹ ਜੋ ਆ ਸੁਆਜ ਹੈ ਸੁਆਜ ਚ ਫਗਦਾਂਤੇ ਸਹਸਾਰੀਓ ਸੁਭਾਜ ਦਾ ਸੁਭਾਜ ਸਹਸਾਰ ਦਾ ਸੁਭਾਜ ਦਾ ਸੁਭਾਜ ਕਹਿੰਦੇ ਜਦੋਂ ਜੋੜੇ ਨਹੀਂ ਆਇਆ ਸੁਭਾਜ ਰੋਦੇ ਤੇ ਸੁਭਾਜ ਅੱਡ ਨਿਕਲੂਗੀ ਨਿਕਲੂ ਅਸੀਂ ਇਸ ਸਮਾਜ ਅਸੀਂ ਛੱਡਦੇ ਚਲਦੇ ਸਿੱਖੀ ਨੂੰ ਜੱਫੇ ਪਾਉਂਦੇ ਅਸੀਂ ਸਾਰੀ ਸੁਭਾਜ ਨੂੰ ਉਸੇ ਘਰ ਡੋਲੋ ਇਹ ਬੜੀ ਜੀ ਅਗੇ ਨੰਬਰ ਨਾ ਬੋਲੋ 10 ਅੱਗੇ ਨੰਬਰ ਛੱਡੋ ਜੀ ਮੈਂ ਦਿ ਪੋਸਿਬਿਲਿਟੀ ਹੈ ਜੇ ਜਮਾਜ ਸਿੱਖ ਬਣ ਗਈ ਫਿਰ ਤਾਂ ਸੱਚਖੰਡ ਇੱਥੇ ਬਣ ਗਿਆ ਸੱਚਖੰਡ ਬਣ ਗਿਆ ਤੇ ਕੋਰਗਾਲ ਪਰਸੋਂ ਚੱਲ ਗਈ ਉੱਥੇ ਬੁੱਢਾ ਸੀ ਆਇਆ ਕਿ ਪਰਸੋਂ ਦੱਸਿਆ ਜੀ ਚੱਲ ਗਈ ਰਗਾੁਰੂ ਦਾਸ ਆਦਮੀ ਜਿਹੜਾ ਹੈਗਾ ਇਸ ਸੰਸਾਰ ਨੂੰ ਖਤਮ ਕਰ ਰਿਹਾ ਅਵਤਾਰ ਗੁਰੂ ਦਾ ਆ ਸੰਸਾਰ ਖਤਮ ਕਰਕੇ ਸਾਰੇ ਸੱਚਾ ਚੱਲ ਗਈ ਗੱਲ ਹੁੰਤੇ ਜਨ ਇਹ ਤੇ ਔਰ ਤੇਜ ਜਲਦੀ ਪੈਦਾ ਕਰ ਰਹੀ ਹੈ ਕੋਈ ਮੁਕਤ ਕਰਿਆ 2000 ਦੋਹਾਂदाई ਮਤਲਬ ਹੈ ਆਪਾਂ ਵਿਰੋਧੀ ਰੋਲ ਹੈ ਉਹ ਮਾਇਆ ਨਾਲ ਝੋਲ ਰਹੀ ਹੈ ਮਾਇਆ ਤੋੜ ਤੋੜ ਕੇ ਕਹਿੰਦਾ ਸੱਚ ਨੂੰ ਜਾਉ ਸਕਦਾ ਉਹ ਰੋਲ ਹੋ ਰਿਹਾ ਉਹ ਜਿਹੋਦਿਆਂ ਨੂੰ ਮਾਰ ਰਿਹਾ ਹੈ ਇਹ ਮਰੇ ਹੋ ਨੂੰ ਜੀਵਨ ਦੇ ਰਹੀ ਹੈ ਮਰੇ ਹੋ ਨੂੰ ਜੀਵਨ ਦੇ ਰਹੀ ਹੈ ਤੇ ਤੇ ਜਿਹੜਾ ਮਰਿਆ ਸੀ ਉਸ ਨੂੰ ਜੀਵਨ ਉਸ ਅਦਾ ਜੋ ਕੱਢ के ਸਾਚ ਨੂੰ ਲੈ रहे ਰਿਹਾ ਦਵਾਨਾ ਵੈਲਕਮ ਹਰ ਕਰ ਦੋ ਕਿਵੇਂ ਲੱਗ ਬਦਵਾਨੋ ਤਾਂ ਹੀ ਬਦਵਿਤਰ ਲੁੰਗਦਾ ਕੀ ਹੈ ਧਰਮ ਦਾ ਰੋਲ ਕੀ ਹੈ ਇਹ ਵੀ ਪਤਾ ਉਹਨਾਂ ਨੂੰ ਧਰਮ है। ਕੀ ਰੋਲ ਹੈ ਪਤਾ ਕਿ ਸਰ ਜੇ ਪਤਾ ਹੀ ਨਹੀਂ ਹੈ ਰੋਲਾ ਦਾ ਤਾਂ ਧਰਮ ਦੇ ਪ੍ਰਤੀ ਉਹ ਆਦਮੀ ਬੋਲੇ ਜੋ ਧਰਮ ਦਾ ਗਿਆਨ ਹੋਵੇ ਧਰਮ ਕੀ ਕਰ ਰਿਹਾ ਹੈ ਆ ਧਰਮ ਕੀ ਕਰ ਰਿਹਾ ਇਹ ਨੈਦਰ ਸਮਾਜਿਕ ਸੁਧਾਰ ਹੈ ਇਹ ਸਮਾਜਿਕ ਸੁਧਾਰ ਸਮਾਜਿਕ ਸੁਧਾਰ ਵੀ ਹੈ ਨਾ ਸਮਾਜਿਕ ਸੁਧਾਰ ਨਾਲ ਜਿਹੜੀ ਮੁੱਦੇ ਪੁੱਛਿਆ ਜਾਂਦਾ ਆਪਾਂ ਗਧੇ ਦਾ ਜਾਲ ਨਾਲ ਰਲੀ ਹੈ ਸਮਾਜ ਸੰਸਾਰ ਤੋਂ ਨੂੰ ਸਮਾਜ ਖਤਮ ਕਰ ਰਿਹਾ ਹੈ ਵਤਨ ਨੂੰ ਝੂਠ ਪ੍ਰਧਾਨ ਉਸ ਸਮਾਜ ਦੇ ਵਿੱਚ ਚੂੜ ਦੇ ਖਰਾਬ ਛੱਡਾ ਛੁੱਟ ਜਗਦੀ ਸੁਗਾ ਜੇ ਕਿਉਂਕਿ ਇਹ ਘੂੜ ਘਟਾ ਸਮਾਜ ਨੂੰ ਸਾਡੀ ਕੌੜਾ ਕਿਉਂ ਲੱਗਦਾ ਹੈ ਪੇਕੇ ਵੀ ਠੀਕੇ ਉਹਨਾਂ ਦੀ ਇਹ ਸਮਾਜ ਦੇ ਫਿੱਟਦੀ ਹੈ ਇਧਰ ਨੂੰ ਸੋ ਆਦਾਂ ਦਾ ਖਰਾਬ ਹੈ ਹਾਂ ਸਮਾਜ ਦੇ ਹੱਕ ਜੋ ਦੂਏ ਧਰ ਹਾ ਹੁੱਕਰ ਦੀ ਕਰਨਿਆ ਉਹ ਆ ਜਿਹੜਾ ਹੁੱਕਰ ਅਸੀਂ ਕੀਤਾ ਤਾਂ ਤੁਹਾਨੂੰ ਇਸ ਵਜ੍ਹਾ ਦੇ ਫਿੱਟ ਕਰਦਾ ਥੋੜਾ ਬੋ ਤਾਂ ਘੱਟ ਵੱਡ ਕਰਕੇ ਉੱਥੇ ਹੀ ਸਾਨੂੰ ਹੌਲੜਕਾ ਸਿੱਕ ਕਰਦੇ ਕਿਨੇ ਬਾੜੀ ਕੀ ਕਹਿੰਦੀ ਹੈ ਇਸ ਗੱਲ ਦਾ ਰੋਣਾ ਤਾਂ ਸੀ ਕਰ ਲਿਆ ਸਰਦਾ ਦੀ ਸੀ ਗੁਰਦੁਆਰੇ ਜਿੱਦੀ ਭੀੜ ਜ਼ਰੂਰ ਕਰਦੀ ਸੀ ਉਲਜੋਗੋ ਜੇ ਹੋ ਰਿਹਾ ਹੋਏ ਬਦੌਬਦੀ ਹੋ ਰਿਹਾ ਕਿ ਕਰ ਉਹ ਜਾ ਬੈਗ ਉਹ ਜੋ ਕੁਝ ਹੋ ਰਿਹਾ ਹੈ ਜੇ ਇਹਦਾ ਕਰੀਏ ਫਿਰ ਭੀੜ ਘਟਦੀ ਹੈ ਕੇਰੂ ਕੇਰ ਕਰਦੇ ਫਿਰ ਕਹਿੰਦੇ ਫਿਰ ਤਾਂ ਖੋੜਵਾ ਡਿਮਾਂਡ ਪੂਰੀ ਕਰ ਹੀ ਨਹੀਂ ਸਕਦਾ ਹਾਂ ਇਹਦੇ ਪਾਵਰ ਦੀ ਪਾਵਰ ਮੱਖਾ ਕੋਲ ਡਿਪਵਾਉਂਦੇ ਜਿਹੜਾ ਪੂਰੀ ਕਰ ਸਕਦਾ ਇਹਦਾ ਰਮਾਲਾ ਉੱਡ ਜਵੇ ਆਪ ਨਹੀਂ ਲੈ ਸਕਦਾ ਹਵਾਨਾ ਉੱਡ ਜਵੇ ਨਰਮਗਣਾ ਲੈ ਕੇ ਦਿਖਾ ਦੇ ਸੋਨਾ ਗਲਾ ਸਵਰਤ ਦੇ ਉੱਪਰ ਹਵਾਨਾ ਉੱਡ ਜਵੇ ਲੈ ਲੋ ਆਪ ਫਿਰ ਐਵੇਂ ਜਾਈ ਜਨ ਜੇ ਤੁਸੀਂ ਆਪਣੇ ਆਪ ਨੂੰ ਧੋਖੇ ਜਿ ਰੱਖਣ ਜਿਵੇਂ ਉਹਨਾਂ ਨੇ ਪੱਥਰ ਪੂਜੀ ਸੀ ਰੱਖਦੇ ਰਹੋ ਫਿਰ ਕੀ ਫਰਕ ਉਹੀ ਦਾ ਰਖਦੇ ਤੁਸੀਂ ਬਿਰਸਦੇ ਰਹੋ ਆਹ ਯਾਰ ਹੀ ਛੜਦਾ ਬਣਾ ਦੀ ਸੀ ਉਹ ਥੋੜੀ ਫਿਰ ਸੇਮ ਕੋਈ ਦੂਜੇ ਬੋਲਾ ਵੀ ਕੀ ਬਰਪੇ ਚ ਆਹ ਤਿਆਰ ਕੀਤਾ ਜਿੰਦ ਲਾਹੌਰ ਭੇਜਿਆ ਹਾਂ ਕਰਦਾ ਗਿਆ ਸੀ ਕੋਈ ਨਹੀਂ ਅੱਜ ਅੱਗੇ ਫਿਰ ਕੀ ਹੋ ਗਿਆ? ਉੜ ਕੀ ਹੋ ਗਿਆ? ਛਾਪੇ ਗਾਰਡਨ ਕੀ ਹੁੰਦਾ? ਲਗ ਲਗ ਪਤਰਾ ਹੁੰਦਾ। ਫਿਰ ਕੀ ਦੀ। ਛਾਤੀ ਦੇ ਕੇ ਪਾਉ। ਹੂੰ। ਉੜ ਪ੍ਰਾਪਰਤਾ ਚਾਹਰਦੀ ਹੁੜੋ। ਪ੍ਰਾਂਪੈ ਗਿਓ? ਗੱਲ ਹੋ ਜਾਂਦੀ ਫਿਰ ਹੋਰ ਕੀ ਹੋਇ। ਉਹ ਹੀ ਆਰ ਕੀ ਹੈ? ਉਹ ਨਹੀਂ ਮੰਦੇ ਨਹੀਂ ਐਵੇਂ ਆ ਗੱਲ ਤਾਂ ਉਹ ਹੀ ਦੇ ਉਹ ਹੀ ਮੁੱਠੀ ਉਹਨਾਂ ਬਣ ਗਏ ਜੋ ਕੰਮ ਲੈਣਾ ਸੀ ਤੇ ਜਿਹੜੇ ਬਦਲਵਾਸ ਤੇ ਬਲੇਜ ਉਹ ਲੈ ਨਹੀਂ ਰਹੇ ਤੇ ਜੋ ਕੰਮ ਦੇਣਾ ਸੀ ਉਹ ਤਾਂ ਲੈ ਨਹੀਂ ਰਹੇ ਗਾਈਡੈਂਸ ਲੈਣੀ ਸੀ ਉਹ ਤਾਂ ਲੈ ਨਹੀਂ ਰਹੇ ਪੈਸੇ ਇਕੱਠੇ ਕਰ ਰਹੇ ਹਲੋ ਰੋਲੋ ਹਲੋ ਰੋਲੋ ਵਾ ਕੀ ਹੋ ਕੀ ਹੈ ਉਹ ਤਾਂ ਕੋਲ ਨਹੀਂ ਹੈ ਉਹ ਉਹ ਕਹਿ ਰਹੇ ਮੈਂ ਕਹਿੰਦਾ ਗੁਰੂ ਕਿਉਂ ਨੇ ਕਹਿ ਹੁੰਦਾ ਜੇ ਤੂੰ ਕਹਿ ਲ ਤੈਨੂੰ ਪਲੇਖਾ ਹੋਵੇ ਵੀ ਗੁਰੂ ਅਸੀਂ ਤਾਂ ਲਗਿਆ ਨਾ ਕਿ ਅਸੀਂ ਗੱਲ ਬੰਦ ਇਹ ਨਹੀਂ ਸੀ ਕਿ ਕਹਾਂ ਲਈ ਹੈ ਕਿ ਤੋ ਉਹ ਇਹਦੀ ਕੱਲ ਗੱਲ ਕਰਨ ਵਾਸਤੇ ਕੋਈ ਸਿੱਖ ਗਾਈਡਸ ਵਾਸਤੇ ਕਿਸੇ ਗੁਰੂ ਲਿਖਿਆ ਮੈਂ ਤਾਂ ਪਹਿਲਾਂ ਨਾਲ ਡੀਪੋ ਦੀ ਪਰਮੇਸ਼ਰ ਕਥਾ ਪਰਮੇਸ਼ਰ ਤੋਂ ਸਿੱਧੇ ਪੜ੍ਹ ਗੁਰੂ ਦਾ ਕੀ ਲੈਣਾ ਸੀ ਚੜਾਵਾ ਚਾਹੀਦਾ ਦੇਖੋ ਜਿਹੜਾ ਵਾਹ ਚੜਦਾ ਪਰਮੇਸ਼ਰ ਕਥਾ ਨਾਲ ਪੜਾਉਂਦੀ ੁਕਮਣੀ ਚੀ ਸੀ ਗੁਰੂ ਕਿਹੜਾ ਵਾਹ ਚੜਦਾ ਰਹੇਗਾ ਉਹ ਜਿਹੜਾ ਬੇਵਰ ਰਿਜ਼ਲਟ ਆ ਦੇ ਗਰਾਉਂਡ ਹੰਗ ਲੱਗੇ ਪਰ ਅਸੀਂ ਆਪਣਾ ਬੇਸ਼ਿਕਾ ਚਕਾ ਲਿਆ ਵਾ ਬੰਨਣਾ ਨਾ ਅਸੀਂ ਜਾਸੀ ਰਹੇ ਹੁਣ ਨਹੀਂ ਬੰਨਣ ਵਾਸਤੇ ਗੁਰੂ ਨੇ ਲਿਖਿਆ ਜੋ ਜੇ ਅਸੀਂ ਉਹ ਮੇਰੇ ਮੂਹਰੇ ਨਹੀਂ ਚੱਕੀ ਜਾਵੇ ਕਹਿੰਦਾ ਬਾਤ ਕਹਿੰਦੇ ਹੋ ਤਾਂ ਕੋਈ ਬਹਿ ਦਰਦੀ ਲੱਗਦਾ ਉਹ ਬਹਿਗਾ ਬੈਤਰ ਜਿਹੜਾ ਨਾਲ ਦੇ ਮੈਂ ਵੀ ਉਹ ਜੇ ਬੈਠਾ ਕਹਿ ਰਿਹਾ ਮੈਂ ਕੋ ਲੋਕ ਕਹਿ ਰਿਹਾ ਜੇ ਬਲਾਲੇ ਜਾਏਗਾ ਉਹ ਤੇ ਉਹ ਤੇ ਕਹਿ ਰਿਹਾ ਮੈਨੂੰ ਪਤਾ ਹੈ ਕੁਝ ਠੀਕ ਹੈ ਇਹ ਠੀਕ ਹੈ ਤੋ ਬਦ ਉਹ ਪਹਿਲਾ ਕਹਿ ਗਿਆ ਵਾਹ ਤੂੰ ਬਲਾ ਲੈ ਜਾ ਇਹਦਾ ਤੂੰ ਮਾਦਾ ਬੁੱਧੇ ਕਰ ਕਹਿੰਦਾ ਡਰਦਾ ਸੱਚ ਹੈ ਪੁੱਛਿਆ ਤਾਂ ਪੁੱਛਿਆ ਵੈਨ ਦਾ ਤਾਂ ਸੱਚ ਹੈ ਕਿ ਨਾ ਦਾ ਤਾਂ ਤੇਰੀ ਤਸੱਲੀ ਨਹੀਂ ਹੋਈ ਤੂੰ ਦੱਸਵੇਂ ਤੇਰੀ ਤਸੱਲੀ ਹੋਈ ਤੈਨੂੰ ਜਵਾਬ ਮਿਲੇਗਾ ਜਵਾਬ ਤਾਂ ਮਿਲ ਗਿਆ ਪਰ ਤੂੰ ਵੀ ਡਰਦੀ ਲੱਗਦਾ ਉਹ ਬੇਰਹਿਮਾਤੀ ਕੀ ਲੈਣਾ ਤੂੰ ਆਪਣੀ ਆ ਹਾਂ ਜੇ ਹੈ ਇਹਨਾਂ ਦੇ ਛੇਤਰ ਉਹ ਬਣਦੇ ਨੇ ਜਿਹੜੇ ਪਠਾਣੇ ਦਾ ਬਿਆਨ ਆਏਗਾ ਦਿਨ ਜਬਾਉ ਦਾ। ਐਂ ਤੇਰਾਸੀ ਭੁੱਲ ਗਈ ਤੂੰ। ਸਿੱਖਾਂ ਦੀ। ਪਠਾਣੇ ਦਾਲਾ ਪਾਗਲ ਹੈ ਗੱਲ ਕਹਿ ਕੇ ਕਹਿਦਾ ਦਿੱਤੀ। ਹਾਂ ਤੂੰ ਮਹਿਰਾ ਹੋ ਗਿਆ। ਉਹ ਤਾਂ ਕਹਿਦਾ ਬਣ ਗਈ ਸਾਰੀ ਸਿੱਖਾਂ ਦੀ। ਪੱਕੀ ਹੋ ਗਈ। ਚਾਲੀ ਦੇ ਨੇ ਉੱਥੇ ਦੀ ਬੋਰਡ ਜਿਹੜੀ ਸਿੱਖ ਰੋਜ਼ੀਆ ਰੇ ਤੇਰੀ ਮਦਦ ਨਹੀਂ ਲੈ ਕੇ ਗਏ ਰਸਤੇ ਸ਼ਰਾਰਤ ਨਾਲ ਬਹੁਤ ਲੁਕੀ ਜਾ ਰਿਹਾ ਜਦੋਂ ਕਹਿ ਵੀ ਦਿੱਤਾ ਵੀ ਗਲਤ ਹੈ ਬੀਜਪੀ ਜੇਦਾ ਬਲਾਗ ਕਰਦੀ ਆ ਉਦੀ ਉੱਥੇ ਕਿੱਥੋਂ